ਨਾਨਾ ਰੂਪਾ ਨਾਨਾ ਜਾ ਕੇ ਰੰਗ ਨਾ ਨਾ ਨਾਨਾ ਨਹੀਂ ਹੁੰਦਾ ਨਾ ਨਾ ਹਾਂ ਨਾਨਾ ਇੱਕ ਨਾਨਾ ਇੱਕ ਹੋਰ ਚੀਜ਼ ਹੈ ਨਾਨੇ ਕਹਿੰਦਾ ਹਾ ਹੁੰਦਾ ਨਾਨਾ ਦਾ ਮਤਲਬ ਹੁੰਦਾ ਛੋਟਾ ਨਾਨਾ ਕੇ ਰੰਗ ਨਾਨਾ ਹੁੰਦਾ ਛੋਟੇ ਤੋਂ ਛੋਟਾ ਨਾਨਾ ਹੁੰਦਾ ਡਿਫਰੈਂਟ ਕਿਸਮ ਦੇ ਨਾਨਾ ਪੈਦ ਪੈਦ ਨਾਨਾ ਕੇ ਰੰਗ ਜੇ ਨਾਨਾ ਦੇ ਹਾਇ ਹੁੰਦਾ ਨਾ ਉਹ ਤਾਂ ਛੋਟੇ ਤੇ ਛੋਟਾ ਸੁਖ ਸੁਖ ਪਤਰਾ ਬਰੀਕ ਤੋਂ ਬਰੀਕ ਜਿਵੇਂ ਥੋੜੇ ਬੱਚੇ ਨੰਨਾ ਕਹਿੰਦੇ ਹਾਂ ਨੰਨਾ ਉਹ ਨਾਨਾ ਨੰਡੇ ਤੇ ਬਣੇ ਛੋਟਾ ਤੇ ਬਣਿਆ ਕਿ ਨਾਨਾ ਪ੍ਰਕਾਰ ਹੈ ਉਹ ਹਾ ਹਾ ਵੀ ਬੋਲਣਾ ਉਹ ਤੇ ਡਿਫਰੈਂਟ ਪ੍ਰਕਾਰ ਦੇ ਨਾਨਾ ਪਿੰਨੋ ਨਾਨਾ ਨਾਨਾ ਜਾ ਕੇ ਰਹਿੰਦੇ ਹਾਂ ਨਾਨਾ ਹੋ ਰੂਪ ਤਾਂ ਕਹਿੰਦਾ ਚਲੋ ਨੰਨਾ ਛੋਟਾ ਰੰਗ ਕਿਵੇਂ ਕਹਿੰਦੇ ਛੋਟਾ ਰੰਗ ਕਿਵੇਂ ਕਹਿੰਦੇ peskar ke rang daan taan laaya ke te dua na na na palde nana roop nana jaake rang ha nana roop nana jaake rang pit pit ne rangne pit pit ne roop ne nana te ik tarah ik rang different kisam de pehne different kisam de wala peh kare ik rang jo par oh ik rang ਉਹ ਜਿਹੜਾ ਜਿਹਦੀ ਗੱਲ ਚੱਲਦੀ ਹੈ ਨਾ ਚੈਗੋਟ ਦੇ ਪਰਪਨ ਹੈ ਉਹ ਇੱਕ ਰੰਗ ਕਰਦਾ ਉਹ ਲਾਲੀ ਹੈ ਨਾ ਰੰਗਣ ਵਾਲਾ ਜਿਹੜੰਦੇ ਸਾਹਿਬ ਉਹ ਰੰਗ ਨਹੀਂ ਨੂੰ ਚਾੜਦਾ ਨਾ ਪ੍ਰਕਾਰ ਦਾ ਕੋਈ ਆ ਜਾਏ ਇੱਕੋ ਰੰਗ ਕਰ ਦਿੰਦਾ ਸਾਰਿਆਂ ਨੂੰ ਜਿਹੜਾ ਸੱਚ ਦੇ ਦਾਰੇ ਜਾ ਕੇ ਸੱਚ ਆਪਣਾ ਰੰਗ ਕੱਢ ਦਿੰਦਾ ਕੋ ਰੰਗ ਹੋ ਜਾਂਦਾ ਪਹਿਲਾਂ ਕਿਹਾ ਜਾਈ ਹੋਵੇ ਚਾਹੀਦਾ ਸਰੇ ਕਲੰਦ ਨਾ ਨਾ ਵਿਦ ਕੀਨੋ ਵਿਸਾਰ ਨਾ ਨਾ ਵਿਦ ਕੀਨੋ ਵਿਸਾਰ ਨਾਨਾ ਪ੍ਰਕਾਰ ਨਾਲ ਵਿਸਾਰ ਕੀਤਾ ਸ੍ਰੀਦਾ ਹਾਂ ਪ੍ਰਭ ਅਬਨਾਸ਼ੀ ਇਕੰਕਾਰ ਪ੍ਰਭ ਫੇਰ ਵੀ ਅਬਨਾਸ਼ੀ ਹੈ ਪ੍ਰਭ ਆਲੰਕਾਰ ਇਸ ਤਿਹੇ ਉਹ ਕੀ ਇਕੰਕਾਰ ਪੂਰਨ ਬ੍ਰਹਮ ਦੇਖੋ ਇਕੰਕਾਰ ਹੈ ਇਕ ਓੰਕਾਰ ਨਹੀਂ ਹੈ ਪ੍ਰਭ ਆਊਗਾ ਇਕੰਕਾਰ ਹੀ ਆਊਗਾ ਇੱਕ ਓਕਾਰ ਹੈ ਊਗਾ ਓਂਕਾਰ ਨਹੀਂ ਆ ਸਕਦਾ ਓਂਕਾਰ ਸਾਰੇ ਨਹੀਂ ਮਿਲਦੇ ਓਂਕਾਰ ਸ਼ਬਦ ਦਾ ਰੂਪ ਹੈ ਓਂਕਾਰ ਉਹ ਤਾਂ ਓਂਕਾਰ ਹੈ ਜਿਹੜਾ ਉਹ ਅਨੇਕ ਹੈ ਫਿਰ ਏਕ ਹੈ ਜਦ ਇੱਕ ਬੂੰਦ ਦੀ ਗੱਲ ਕਰਾਂਗੇ ਉਹ ਬੂੰਦ ਦੇ ਸਮੁੰਦਰ ਦੀ ਗੱਲ ਕਰਾਂਗੇ ਤਾਂ ਗੱਲ ਹੋਰ ਹੈ ਤਾਂ ਸਾਰੀਆਂ ਬੂੰਦਾਂ ਦੀ ਗੱਲ ਕਲੈਕਟਿਵ ਆ ਜੂਗੀ ਜੇ ਹਕਮ ਦੀ ਗੱਲ ਕਰਦੇ ਆ ਸਮੁੰਦਰ ਦੀ ਗੱਲ ਜਦ ਇੱਕ ਮੂਲ ਦੀ ਗੱਲ ਕਰਨੇ ਬੋਲ ਬ੍ਰਹਮ ਦੀ ਗੱਲ ਹੈ ਬੋਲ ਬ੍ਰਹਮ ਦਾ ਹੀ ਹੁਕਮ ਇਹ ਠੀਕ ਹੈ ਵੀ ਸਾਰਿਆਂ ਦਾ ਹੀ ਹੈ ਪ੍ਰਭਵਨਾਸ਼ੀ ਏਕ ਓੰਕਾਰ ਪ੍ਰਭਵਨਾਸ਼ੀ ਏਕ ਓੰਕਾਰ ਹੁੰਦਾ ਉਹ ਸ਼ਬਦ ਤਾਂ ਰਹਿੰਦਾ ਨਹੀਂ ਜਦ ਬਨਾਸ਼ੀ ਕਿਵੇਂ ਹੋ ਗਿਆ ਹੋ ਉਸੇ ਉੱਤੇ ਤਾਂ ਹੁਕਮ ਬਾਰੇ ਹੁਦਾਈ ਦੀ ਇੱਕ ਓੰਕਾਰ ਬਨਾਸ਼ੀ ਨਹੀਂ ਏ ਓੰਕਾਰ ਬਨਾਸ਼ੀ ਏ ਇੱਕ ਓੰਕਾਰ ਓੰਕਾਰ ਪੂਰਨ ਬ੍ਰਹਮ ਜੋ ਤਬਨਾਸ਼ੀ ਏ ਸ਼ਬਦ ਬਨਾਸ਼ੀ ਨਹੀਂ ਏ ਸ਼ਬਦ ਦਾ ਹੈ ਖਦਮ ਅਕਾਲ ਹੈ ਜਿਹੜਾ ਇਹ ਓੰਕਾਰ ਹੈ ਨਾ ਏਕ ਉਹ ਅਕਾਲ ਹੈ ਉਹ ਪੈਦਾ ਕੀਤਾ ਹੋਇਆ ਸ਼ਬਦਾਕਾਲ ਉਹ ਨਹੀਂ ਹਮੇਸ਼ਾ ਰਹਿਣਾ ਉਹਨਾਂ ਜਿਹੜੇ ਜਨਕ ਸ੍ਰਿਸ਼ਟੀ ਹੈ ਇਹ ਕਰਕੇ ਅਬਨਾਸ਼ੀ ਇਹਦੇ ਨਾਲ ਲੱਗਦਾ ਹੈ ਪਰ ਬਣਾਉ ਸਮਝੇ ਨਹੀਂ ਉਹਦਾਂ ਨਹੀਂ ਲੱਗ ਸਕਦਾ ਜਿਹੜਾ ਇੱਕ ਕੰਕਾਰ ਸਰੂਪ ਹੈ ਉਹ ਨਹੀਂ ਅਬਨਾਸ਼ੀ ਇਹਦਾ ਉਹਨਾਂ ਮਨਾਂ ਨਾਸ਼ੀ ਨਹੀਂ ਲੱਗਿਆ ਅਕਾਲ ਮੂਰਤ ਲੱਗਿਆ ਹਮੇਸ਼ਾ ਰੂਹ ਦਾ ਹੁਕਮ ਹੋਦਾ ਅਕਾਲ ਮੂਰਤ ਦਾ ਲੱਗਿਆ ਨਾਸ਼ੀ ਨਹੀਂ ਲੱਗਿਆ ਅਕਾਲ ਮੂਰਤ ਲੱਗਿਆ ਨਾਸ਼ੀ ਨਹੀਂ ਲੱਗਿਆ ਇਹ ਦੋਹਾਂ ਚੀਜ਼ਾਂ 'ਚ ਬਹੁਤ ਥੋੜ੍ਹਾ ਫਰਕ ਆ ਉੱਤੇ ਅਕਾਲ ਮੂਰਤ ਲੱਗਿਆ ਜਿੱਥੇ ਕੋਮਕਾਰ ਇਹ ਕਾਲ ਸ਼ਬਦ ਹੈ ਪਰ ਇਹਦਾ ਕਾਲ ਨਹੀਂ ਕੋਈ ਇਹਦੇ 'ਚ ਇਹ ਗੁਪਤ ਪ੍ਰਗਟੇ ਹੁੰਦਾ ਹੁਗਮ ਗੁਪਤ ਪ੍ਰਗਟ ਹੁੰਦਾ ਜੇ ਪ੍ਰਗਟ ਹੁੰਦਾ ਤਾਂ ਥਾਲ ਹੈ ਤੇ ਗੁਪਤ ਹੋ ਜਾਂਦਾ ਫਿਰ ਅਕਾਲ ਰੂਪ ਰਹਿ ਜਾਂਦਾ ਕਾਲ ਰੂਪ ਗੁਪਤ ਹੋ ਜਾਂਦਾ ਕਾਲ ਰੂਪ ਦੀ ਉਹਦੋਂ ਤੱਕ ਲੋੜ ਹੈ ਜਿੰਨਾ ਤੇ ਉਸੇ ਸੀਤੀ ਹੈ ਸੀਤੀ ਦੀ ਹੀ ਲੋੜ ਹੈ ਨੰਨਾ ਚਲਤ ਤਲਵਾਰ ਜਦੋਂ ਮਹਾਂ ਤੇ ਬਾਹਰ ਕੱਢੀ ਰੂਪ ਦੋ ਹੋ ਗਏ ਉਹਦੇ ਦੋ ਰੂਪ ਹੋ ਗਏ ਇੱਕ ਬਿਆਨ ਇੱਕ ਤਲਵਾਰ ਹੈ ਤਲਵਾਰ ਜਦੋਂ ਮਹਾਂ ਤੇ ਬਾਹਰ ਕਾ ਹੁੰਦੀ ਤਾਂ ਮਹਾਂ ਨਾਲ ਤਲਵਾਰ ਡੋਟ ਦੋ ਹੋ ਜਾਂਦੇ ਨੇ ਜਦ ਤਲਵਾਰ ਮਹਾਂ ਦੇ ਵਿੱਚ ਆ ਗਈ ਸਮਾ ਫੇਰ ਫਿਰ ਤਾਂ ਕਿਹ ਰਹੀ ਨਾ ਚਾਏ ਉਹਦਾ ਤਲਵਾਰੇ ਭਜਦਾ ਕੌਣ ਹੈ ਕੋਦੋ ਨਾ ਨਾ ਚਲਪ ਕਰੇ ਖਿਨਵਾਹੀ ਹੈ ਤਾਂ ਕਿਹਨੋ ਜੇ ਜੰਗੇ ਨਹੀਂ ਹੈ ਲੜਾਈਓ ਨਹੀਂ ਹੈ ਝਗੜਾ ਹੀ ਨਹੀਂ ਕੋਈ ਇਹ ਝਗੜਾ ਮਟਾਉਣ ਵਾਸਤੇ ਤਲਵਾਰ ਬਾਹਰ ਆਈ ਹੈ ਝਗੜਾ ਕਰਨ ਵਾਸਤੇ ਨਹੀਂ ਤਲਵਾਰ ਬਾਹਰ ਆਈ ਗਿਆਨ ਫੜੋ ਇਫ ਯੂ ਵਾਟ ਪੀਸ ਵੀ ਪ੍ਰਪੇਅਰ ਫਾਰ ਵਾਰ ਫਕਤਾ ਨੇ ਜਿਹੜੀ ਤਲਵਾਰ ਵਿੱਚ ਲੈ ਕੇ ਆਪਣੀ ਪਰਖ ਕੀਤੀ ਆ ਉਹ ਝੱਡੜਾ ਦੁਨੀਆ ਦਾ ਹਟਾਉਣ ਵਾਸਤੇ ना ਨਾ ਕਿ वास्ते ਵਾਸਤੇ ਹੁਣ ਚਾਉਂਦੀ ਆ ਝਗੜਾ ਹੁੰਦਾ ਦੋ ਪਾਰਟੀਆਂ ਦਾ ਦੋ ਗਰੁੱਪਾਂ ਦਾ ਹੋ ਜਾਂਦੀ ਆ ਝਗੜਾ ਹਟਾਉਣ वास्ते ਆਉਂਦੀ ਆ ਕਿ ਝਗੜਾ ਕਰਨ ਵਾਸਤੇ ਆਉਂਦੀ ਆ ਹਟਾਉਣ ਵਾਸਤੇ ਆਉਂਦੀ ਆ ਇਹ ਤਾਂ ਕਾਲਪੁਰਖੀ ਫੌਜ ਜਿਹੜਾ ਲੜਾਈ ਕਰਦੇ ਨੇ ਉਹਨਾਂ ਦੇ ਖਿਲਾਫ ਹੁੰਦੀ ਹੈ ਪਰਮੇਸ਼ਰ ਝਗੜਾ ਹਟਾਉਂਦਾ ਕਰਾਉਂਦਾ ਨਹੀਂ ਹੈ ਪਰਮੇਸ਼ਰ ਦੇ ਨਾਂ 'ਤੇ ਝਗੜਾ ਕਰਦੇ ਨੇ ਰੱਬ ਦੇ ਨਾਂ 'ਤੇ ਝਗੜੇ ਕਰਦੇ ਨੇ ਧਰਮ ਵਾਲੇ ਕਿਉਂਕਿ ਰੱਬ ਕੱਦ ਕਹਿੰਦਾ ਮੇਰੇ ਨਾਂ 'ਤੇ ਝਗੜਾ ਕਰੋ ਉਹਨੇ ਦੱਸੋ ਕਿੱਥੇ ਕਰ ਆਪਣੇ ਢਿੱਡ ਦੀ ਭੁੱਖ ਨੂੰ ਝਗੜੇ ਕਰਦੇ ਨੇ ਨੌ ਉਹਦਾ ਬਰਨਾਮ ਕਰਦੇ ਤਾਂ ਖਾਲਸਾ ਭੋਜ ਬਣਾਈਓ ਨੇ ਇਹਨਾਂ ਦੇ ਦੰਦ ਪੰਨੋ ਕਿ ਉਹ ਗੱਲ ਕਰਨੇ ਝਗੜਾ ਕਰੋ ਉਹ ਕੁਛ ਥੋੜੀ ਆ 14 ਦਿਨ ਲੜਾਈ ਥੋੜੀ ਆ ਪਰ ਨਾ ਉਹ ਨੂੰ ਕਰਦੇ ਹੋ ਤੁਸੀਂ ਸਰਕਾਰ ਕਦਰ ਚਾਹੁੰਦੀ ਏ ਝਗੜਾ ਕਰੋ ਸਰਕਾਰ ਤਾਂ ਕਹਿੰਦੀ ਆ ਮੰਨਣਾ ਰਹਿਣ ਸਾਰੇ ਇਹ ਬਹਾਨੇ ਬਾਝ ਝਗੜੇ ਕਰਦੇ ਨੇ ਹਾਂਜੀ ਇਕ ਓੰਕਾਰ ਅਬਾਹ ਏਕੰਕਾਰ ਇਕ ਅਕਾਰ ਹੋ ਇਕੰਕਾਰ ਇਕ ਅਕਾਰ ਇੱਕ ਇੱਕ ਏਕੰਕਾਰ ਹੈ ਕਾ ਵਿਚਈ ਉਹਦੇ ਉਥੇ ਇੱਕ ਆਡਾ ਓੰਕਾਰ ਹੈ ਇੱਕ ਵੱਖਰਾ ਹੈ ਉਥੇ ਦੋ ਰੂਪ ਨੇ ਕਹਿੰਦੇ ਦੋ ਰੂਪ ਔ ਜਮਾ ਆਕਾਰ ਹੈ ਉਥੇ ਇਤੇ ਓੰਕਾਰੇ का ਵਿਚਈਏ ਦੇ ਨਾਲ ਜੋੜਿਆ ਹੋਇਆ ਉਤੇ ਇੱਕ ਵੱਖਰਾ ਹੈ ਏਕਾਲਿਖਾ ਉਤੇ ਅਖਰੜਾ ਇਤੇ ਈਣੀ ਨੂੰ ਏਕਮ ਲਿਖਿਆ ਹੋਇਆ ਨਾਲ ਉਤੇ ਤੇ ਕਰੂ ਸਪਲਟ ਕਰਕੇ ਦੋ ਹੋਏ ਹੋਏ ਨੇ ਓੰਕਾਰ ਇਕਾ ਹੁਣ ਲਹਿਰ ਉੱਠੀ ਹੈ ਪਾਣੀ ਦੇ ਪਰ ਹੈ ਕੋਈ ਇਕੱਠਾ ਜਿੱਥੇ ਲੈ ਜਿੰਦ ਤੱਕ ਪਾਣੀ ਉਸ ਤੱਕ ਲਹਿਰ ਹੈ ਪਾਣੀ ਦੇ ਪਰ ਲਹਿਰ ਨਹੀਂ ਜਾ ਸਕਦੀ ਸੱਤਾਂ ਦਾ ਨਾਮ ਇਕੱਠੇ ਨੇ ਕਰਤਾ ਔਰ ਪਰਖੇ ਕੋਈ ਨਹੀਂ ਦੋ ਨੀਆਂ ਨੂੰ ਦੋ ਹੰਧੇ ਵੀ ਕਰਨ ਇਹ ਹੁਣ ਆਇਆ ਦੋ ਨੇ ਉੱਥੇ ਉਹ ਗੌਰਮੈਕ ਦਾ ਬਾਲਾ ਕਹਿੰਦੇ ਦੋ ਇੱਕ ਚੰਡੀ ਆ ਇੱਕ ਮਾਤਾ ਇੱਕ ਪਿਤਾ ਦੋ ਰੂਪ ਨੇ ਨਾ ਤੇ ਹੋਰੇ ਹੁਣ ਸ੍ਰਿਸ਼ਟੀ ਜਾਰੇ ਚੂ ਮਾਤਾ ਦੀ ਲੋੜ ਨਹੀਂ ਪੈਣੀ ਦੋ ਬਣਨੇ ਨਹੀਂ ਉੱਤੇ ਮਾਤਾ ਪਿਤਾ ਜਿਹਾ ਸੇਸੀ ਰਚੀਏ ਦੋ ਇਕੱਠੇ ਆਉਣੇ ਮਾਤਾ ਦੀ ਲੋੜ ਤਾਂ ਜਿਵੇਂ ਸੇਸੀ ਤੇ ਬਣ ਗਈ ਮਾਤਾ ਦੀ ਲੋੜ ਨਹੀਂ ਹੈ ਸਿਸਿਨੀ ਹੈਤ ਮਾਰਦੇ ਕੀ ਲੋੜ ਇਕ ਰੂਪ ਹੈ ਤਾ ਨਾ ਨਾ ਨਾਨਾ ਕਰੇ ਖਨ ਮਾਹੀ ਨਾ ਨਾ ਚਲਤ ਕਰੇ ਖਨ ਖਨ ਉਹ ਜਿਹੜੀ ਤੁਰਕੀ ਬਾਣੀ ਆ ਮਾ ਰੂਪ ਹੈ ਜਿਹਨੇ ਜਨਮ ਦੇਣਾ ਹੁਕਮ ਨਹੀਂ ਆ ਉਹ ਜਨਮ ਦੇਣਾ ਮਾ ਰੂਪ ਚ ਦੇਣਾ ਗਨ ਹੁਕਮ ਦੇਣਾ ਵੰਦਾ ਮਾਰਨ ਵਾਲਾ ਰੂਪ ਅਕਾਲ ਪੈਦਾ ਕਰਦਾ ਨਾ ਮਾਰਨ ਵਾਲਾ ਰੂਪ ਕਾਲ ਹੈ ਪੈਦਾ ਕਰਨ ਵਾਲਾ ਅਕਾਲ ਹੈ ਅਕਾਲ ਪੈਦਾ ਕਰਦਾ ਹੈ ਕਾਲ ਮਾਰਦਾ ਹੈ ਕਾਲ ਕੀ ਅਕਾਲ ਸਰਦਾ ਆਪਣੀ ਹੁਕਮ ਆਪਣਾ ਮਨ ਹੈ ਸਾਡਾ ਮਨ ਕਾਲ ਹੈ ਉਹਦਾ ਮਨ ਅਕਾਲ ਹੈ ਸਾਡੀਆਂ ਗਲਤੀਆਂ ਹੀ ਸਾਨੂੰ ਜੰਮਣ ਮਰਜ ਰੱਖਦੀਆਂ ਨੇ ਇਹ ਆਪਣੀ ਮਰਜ਼ੀ ਨਾਲੇ ਪੈਰ ਪਵਾੜਾ ਮਾਰਿਆ ਆਪਣੀ ਮਰਜ਼ੀ ਨੂੰ ਮਾਰ ਲੂ ਇਹਦਾ ਕਾਲ ਵਰਗੇ ਸਾਡਾ ਕਾਲ ਕੀ ਹੈ ਸਾਡਾ ਮਨ ਹੈ ਆਪਣੇ ਮਨ ਨੂੰ ਮਾਰ ਲਓ ਜਿਹਨੇ ਆਪਣਾ ਮਨ ਬੰਨ ਲਿਆ ਉਹਨੇ ਕਾਲ ਪਾਵੇ ਨਾ ਬੰਨ ਲਿਆ ਰਾਵਣ ਨੇ ਕਾਲ ਪਾਵੇ ਨਾ ਨਹੀਂ ਬੰਨਿਆ ਆਪਣਾ ਮਨ ਪਾਵੇ ਨਾ ਬੰਨਿਆ ਸੀ ਮਨ ਨੂੰ ਬੰਨਣਾ ਹੀ ਕਾਲ ਬੰਨਣਾ ਕਾਲ ਸਾਡਾ ਸਾਡੀ ਗਲਤੀ ਨਾ ਸਾਡੀ ਗਲਤੀ ਦਾ ਨਤੀਜਾ ਗਲਤੀ ਨਾ ਪੈਦਾ ਹੋਇਆ ਹੋਇਆ ਇਹ ਪੂਤ ਜੀ ਬੋਦਲ ਤੋਂ ਬਾਹਰ ਕੱਢ ਲਿਆ ਵੇਰ ਬੋਦਲ ਦੇ ਪਾਗੇ ਡਟਾ ਲਾ ਦੇਣੇ ਬਸ ਇਹਨੂੰ ਅੰਦਰ ਇਹਨੂੰ ਅੰਦਰੇ ਲਿਜਾ ਕੇ ਉੱਤੇ ਬਦਗਰ ਦੇਣਾ ਪਾਣੀ ਕਰਨਾ ਇਹਨੂੰ ਬਾਹਰ ਕੱਢਿਆ ਬਾਕੀ ਹੋ ਜਾਂਦਾ ਹੈ ਫਿਰ ਅੱਗ ਲੱਕਣ ਦੇ ਵਿੱਚ ਹੈ ਅਗਲੇ ਕੜ ਦੇ ਵਿੱਚ ਬੰਨੀ ਹੋਈ ਜਾਂਦਾ ਜਦ ਧੋਣੇ ਦੇ ਵਿੱਚ ਬਾਂਹਨ ਲਗ ਗਈ ਅਗਰ ਤੂੰ ਹਨ ਨਾਲ ਰੱਖੇ ਕਾਬੂ ਹੋ ਜੂ ਲੱਕੜ ਦੇ ਲੱਕੜ ਤੇ ਜਪਾ ਜਲਵੇ ਦੇਖਾ ਬਲ ਤੂੰ ਹੰ ਫੜ ਲਵੇ ਫਿਰ ਫਿਰ ਆਜ ਬੈ ਜਾ ਉੱਥੇ ਹੀ ਕੁੱਝ ਕੇ ਯਾਗ ਨਿਕਸੈ ਨਾ ਤੇ ਰੂਪ ਹੈਗਾ ਬੰਤੁਹਾ ਰੂਪ ਹੋਰ ਕੁਝ ਨਹੀਂ ਹੈ ਜੇ ਤੂੰ ਆ ਹਨੇਰਾ ਕਰੂਏ ਜਿੰਨੇ ਤਾਂ ਚ ਧੋਹਾਂ ਫੈਲਦਾ ਹਨੇਰਾ ਕਰ ਦਿੰਦਾ ਹੈ ਸਾਲ ਇਹਨੇ ਆਵਾਂ ਨਹੀਂ ਰਹਿਂਦੀ ਆਵਾ ਇਹ ਨੁਕਸਾਨ ਇਹ ਕਰਦਾ ਕੁਝ ਵੀ ਫਾਇਦਾ ਕਰਦਾ ਹਾਂਜੀ ਨਾ ਨਾ ਚਲਿਤ ਕਰੇ ਖਨ ਮਾਹੀਂ ਨਾ ਨਾ ਚਲਿਤ ਕਰੇ ਕਰ ਦਿੰਦਾ ਹਾਂ ਉਹ ਚਲਿਤ ਕਰ ਰਿਹਾ ਅਨੇਕਾਂ ਹੀ ਚਲਿਤ ਕਰ ਰਿਹਾ ਖਰਦੇ ਵਿੱਚ ਹੀ ਕਿਤੇ ਕਿੰਨੇ ਜੀ ਪੈਦਾ ਹੋ ਰਹੇ ਨੇ ਕਿਤੇ ਕੁਝ ਹੋ ਰਿਹਾ ਤੇ ਕੁਝ ਹੋ ਰਿਹਾ ਪੂਰ ਰਹੇ ਪੂਰ ਸਾਰੀਆਂ ਜਗ੍ਹਾ ਜਿੱਥੇ ਜੀ ਪੈਦਾ ਕੀਤੇ ਨੇ ਸਾਰਿਆਂ ਵਿੱਚ ਹੀ ਪੂਰਾ ਕਰ ਰਹੇ ਹੋ ਸਰੀਰਕ ਤੌਰ ਤੇ ਵੀ ਪੂਰਾ ਕਰ ਰਹੇ ਆਤਮਾ ਦੇ ਲੈਵਲ ਤੇ ਵੀ ਪੂਰਾ ਕਰ ਰਹੇ ਪੇੜ ਬੜੇ ਹੋ ਰਹੇ ਨੇ ਆ ਵਿੱਚ ਪੱਤੇ ਬੜੇ ਹੋ ਰਹੇ ਨੇ ਫਲ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਪੂਰੇ ਹੀ ਹੋ ਰਹੇ ਨੇ ਉਹ ਵੀ ਹੁਕਮ ਨਾਲੇ ਹੋ ਰਹੇ ਨੇ ਨਾਨਾ ਵਿਧਿ ਕਰੇ ਨਾਨਾ ਵਿਧਿ ਕਰਾ ਬੰਧ ਬਣਾਈ ਨਾਨਾ ਵਿਧਿ ਕਰ ਬੰਧ ਬਣਾਈ अनेका ਬਧੀਆਂ ਇਨੇ ਜਿਹੜੀ ਦੱਸੀ ਗਈ ਆਪੇ ਗੱਲਾਂ ਜੋ ਦੱਸੀਆਂ ਨੇ ਗਿਆਨ ਕਰਾਇਆ ਹੀ ਕੀਤ ਭਾਈ ਆਪਣੇ ਗੁਨਾ ਦਾ ਆਪੇ ਵਰਣ ਕੀਤਾ ਹੂੰ ਸਭ ਘਟ ਸਭ ਤੇ ਉਸਕੇ ਸਭ ਘਟਿਸਕੇ ਸਭ ਤੇ ਉਸਕੇ ਠਾਉ ਸਾਰੇ ਘਟਾਂ ਦੇ ਵਿੱਚ ਆਪ ਬਸਦਾ ਹੁਕਮ ਹੁਕਮ ਦੇ ਰੂਪ ਵਿੱਚ ਜਪ ਜਪ ਜਪ ਜੀਵੇ ਨਾਨਕ ਘਰ ਇਸ ਕਰਕੇ ਇਹ ਦੁਆਮ ਸਾਰੇ ਘਟਾਂ ਵਿੱਚ ਮੌਜੂਦ ਹੈ ਸਰ ਵਿਆਪੀ ਹੈ ਤੇ ਜਪ ਕੇ ਜਿਹਨੇ ਜਪ ਲਿਆ ਇਹ ਨਾਮ ਨੂੰ ਉਹ ਜਿੱਦਾਂ ਰਹਿੰਦਾ ਫੇਰ ਉਹਨਾ ਉਹੋ ਸਾ ਜੀਵਨ ਪ੍ਰਾਪਤ ਕਰ ਲੈਂਦਾ ਜਪ-ਜਪ ਜੀਬੇ ਨਾਨਕ ਜਪ-ਜਪ ਜਿਹੜੇ ਜਪ ਲਿਆ ਜਿਨ੍ਹਾਂ ਨੇ ਉਹ ਜਿਉਂਦੇ ਨੇ ਜੋ ਜਪਦਾ ਉਹ ਜਿਉਂਦਾ ਹੋ ਜਾਂਦਾ ਜੋ ਜਪ ਲੈਂਦਾ ਜਿਉਂਦਾ ਹੋ ਜਾਂਦਾ ਜੋ ਜਪ ਲੈਂਦਾ ਉਹ ਜਮਨ ਬਨੋਂ ਦਾ ਕਟਿਆ ਜਾਂਦਾ ਜਿਉਂਦਾ ਹੀ ਰਹਿੰਦਾ ਫਿਰ ਉਹ ਜਿਉਂਦਾ ਹੀ ਰਹਿੰਦਾ ਜਿਹੜਾ ਜਪ ਲੈਂਦਾ ਸਮਝਦਾ ਰਹਦਾ ਉਹ ਜਿਉਂਦਾ ਹੈ ਜਿਨ੍ਹਾਂ ਸਮਝਦਾ ਨਹੀਂ ਉਹ ਕਦੇ ਸਮਝਦਾ ਕਦੇ ਜਾਗਦਾ ਸੋਨਾ ਜਾਗਦਾ ਉਹਨਾਂ ਚ ਰਹਾ ਉਹ ਮਰਨਾ ਬੋਲਣਾ ਨਹੀਂ ਹੈਗਾ ਸੋਨਾ ਜਾਗਣਾ ਆ ਵਾ ਉਹ ਸੋਨਾ ਜਾਗਣਾ ਉਹਨਾਂ ਚ ਰਹਾ ਜਿਨ੍ਹਾਂ ਨੇ ਜਪਿਆ ਨਹੀਂ ਜੇ ਜਪ ਲਿਆ ਗੁਰਮੁਖ ਗੁਰਮੁਖ ਜਾਗੇ ਦੀ ਸੁਣੋ